हेरत हेरत हे, हे, हे सखी होए रही हैरान हां हां करती मै मोई शब्द रवै मन जान हेरत हेरत हे, हे, हे सखी होए रही हैरान इन्नू त देखण ओके okay. समझलाओ mm -hmm. सब जिटे देखण mm -hmm. या देख ہیرا تے ہیرا تے ہی ستی جو جو میں سنیا اور سمجھیا متا حیران ہو بھی اے کہ گل ہی ہو رہ ہے ایو طرح دا ہے نہیں جڑا سਾਨੂੰ پڑھا دے رہے نے تے گل بالکل اے بدل گئی ٹھیک ہے اپا دا ورٹائنا سی طائی ہو گیا ارے جی ਇਹ ਤਾਂ ਧਿਆਨਵਾਨਾਂ ਨੂੰ ਬਹੁਤ ਪਤਾ ਨਹੀਂ ਇਹਦਾ ਗੁੱਸਾ ਜੀ ਹੀਰਤ ਹੈਰਤ ਹੈ ਸਕੀ ਹੋਏ ਰਹੀ ਹੈ ਰਾਂਝਾ ਹੂੰ ਯੋਗ ਹੈ ਰਾਂਝਾ ਹੋਈ ਹਾਂ ਕਰਤੀ ਮੈਮੋਈ ਸ਼ਬਦ ਰਵੇ ਮਨ ਗਿਆਨ ਹਾਂ ਕਰਦੀ ਤੋਂ ਕਰ ਦਿਓ ਗੁਣੀਆਂ ਮੈਂ ਅੱਜ ਤੱਕ ਸ਼ਬਦ ਰਵੇ ਬੁੱਧਿਆਨ ਬੰਦ ਤਾਂ ਗਿਆਨ ਸ਼ਬਦ ਰਵੇ ਤੇ ਹੁਣਾਂ ਸੀ ਉਹ ਤਾਂ ਕਿਸੇ ਨੇ ਸਿਖਾਇਓ ਹੀ ਨਹੀਂ ਇਹ ਮੈਂ ਹੁਣ ਸੀ ਇਹ ਤਾਂ ਕਿਸੇ ਨੇ ਦੱਸਿਓ ਦੀ ਸ਼ਬਦ ਰਵੇ ਨਾਲ ਰਵਣ ਮੈਨੋਂ ਆ ਗਿਆ ਤੁਸੀਂ ਬੰਦੂ ਇੱਕ ਵੀ ਦੱਸਿਆ ਦੀ ਗਿਆਨਵਾਨਤਾ ਕੀਤਾ ਲੋਕਾਂ ਨੇ ਅਗਿਆਨੀ ਕਰਕੇ ਫਸਾ ਕੇ ਰੱਖਿਆ ਪੁੱਤ ਜੀ ਸਾਡੇ ਸਾਡੀ ਰਹਿਤ ਆ ਬੰਦੀ ਰਹੇ ਤੇ ਰਿਆਇਆ ਸਾਡੀ ਨਾ ਇਹਨਾਂ ਤੋਂ ਆਪਣੇ ਸੋਨੇ ਦੇ ਬੁੱਧਰੋ ਸਾਫ ਦੇ ਰਹੀਏ ਐਸ਼ ਪ੍ਰਸਤੀ ਕਰਦੇ ਰਹੀਏ ਠੀਕ ਹੈ ਹਾਂ ਹਾਰ ਡੋਰ ਕੰਕਣ ਘਣੇ ਕਰ ਥਾਕੀ ਸ਼ਿੰਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਹਾਰ ਡੋਰ ਕੰਕਣ ਕਾੜੇ ਕਬਣ ਅਸਰੂ ਪਾ ਲੈ ਹਾਰ ਪਾ ਲੈ ਜੋ ਪਾ ਲੈ ਜਰਾਂ ਦੇ ਵਿੱਚ ਦੋਰ ਗੁੱਦ ਦੇ ਠੀਕ ਹੈ ਕੰਕਣ ਕਾੜੇ ਬਥੇਰੇ ਕਰਕੇ ਢੱਕ ਲੈ ਕarnataka ਕੋਟਲੇ ਪਾਲੇ ਦਰ ਤੇ ਮਾਰਾ ਪਾਲੀਓ ਕਈ ਮੀਟੀਆਂ ਉਹ ਕਰਦੇ ਨੇ ਕਰਦੇ ਦੇ ਦੁਰਗਾ ਦੇ ਬਜਾਰੀ ਦੇ ਕੋਈ ਨਾ ਰੂਪ ਨੂੰ ਦੇ ਜਿੱਦਾਂ ਹੋ ਰਹੀ ਕੁਝ ਤਾਂ ਨਹੀਂ ਜਾਂਦੇ ਇਸਰਾਰ ਬਣਾਉਂਦੇ ਬਣਾਉਣੇ ਥੱਕ ਗਏ ਕਰਨਾਜੀ ਸੀ ਅਰਥਾ ਕੀ ਸੀ ਦਰ ਮਨ ਪ੍ਰੀਤਮ ਸੁਖ ਪਾਇਆ ਸਗਲ ਮਨ ਪ੍ਰੀਤਮ ਸੁਖ ਪਾਇਆ ਪ੍ਰੀਤਮ ਮਿਲਿਆ ਸੁਖ ਦਾ ਥਾਣੇ ਆ ਸਗਲ ਬੋਲ ਦਾ ਦਰ ਭਾਰ ਔਰ ਕਾਦਾ ਜਾਈ ਨਾ ਦੀ ਗੁਰੂ ਦਾ ਔਰ ਕਾਦਾ ਪਾਲਿਆ ਬੋਤੀਓ ਦਾ ਅੱਜ ਵੀ ਲੋਬੋਜ ਬਾਤਾਂ ਗੱਲ ਚ ਉਹ ਗੁਣਾਂ ਦਾ ਉਹ ਵੀ ਬੰਦੇ ਗੁੱਦੀ ਦੇ ਗੁਣਾਂ ਸੀ ਸਰੀਰ ਦੇ ਬਾਤਾਂ ਬੋਇਆ ਦੇ ਹਾਂਜੀ ਤੇ ਜੇ ਅਬੇ ਬਜਲ ਘਟਦੀ ਹੋਰ ਬਜਲ ਵੱਧ ਗਈ ਜੇ ਡੁੱਬ ਜੂ ਜਿਹੜੇ ਤੈਸੂਦਰ ਚ ਜਿਆਦਾ ਲੱਗ ਲੈਣਾ ਉੱਤੇ ਸੋਨਾ ਛੇਦੀ ਡੁੱਕੂ ਨਾਨਕ ਗੁਰਮੁਖੀ ਪਾਈਐ ਹਰਿ ਹਰਸਿਓ ਪ੍ਰੀਤ ਪਿਆਰ ਹਰ ਬਿਨ ਸੁਖ ਪਾਇਆ ਦੇਖੋ ਮਨ ਵਿਚਾਰ ਗੁਰਮੁਖੀ ਨਹੀ ਪਾਇਆ ਨਾਦੂ ਗੁਰਮੁਖੀ ਪਾਇਆ ਹਰਿ ਸਿਓ ਪ੍ਰੀਤ ਪਿਆਰ ਉਹਦੇ ਤਾਂ ਪ੍ਰੀਤ ਪਿਆਰੇ ਪਾਇਆ ਕੁਛ ਨਹੀਂ ਆਡੋਰ ਕੰਪਿਊਟਰ ਕਢਿ ਪਾਈ ਅਸੂਪ੍ਰੀਤ ਪਿਆਰ ਇਹ ਪਾਇਆ ਬਿਨ ਪ੍ਰੀਤ ਮ ਸੁਖ ਬਿਨ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਗੁਰ ਵਿਚਾਰ ਹਰ ਤੇ ਬਿਨ ਉਹ ਕਦਸੋ ਕੀਨੇ ਪਾਇਆ ਦੇ ਵਿੱਚ ਆ ਜਿਹੜਾ ਟੰਪਰ ਤੁਸੀਂ ਕਰਦੇ ਹੋ ਹਾਰਡਵਰ ਕੰਪਨੈਂਟ ਕਰਦੇ ਇਹ ਏਡੰਬਰ ਦਾ ਬੋਤਲ ਕੀ ਹੈ ਜਵਾਬ ਦੋ ਹਣ ਕੋਈ ਡਾੜੇ ਰੱਤ ਬਣਾਉਦੇ ਹੋ ਇਹ ਜਦੋਂ ਸਰਬਾਨ ਪਈਏ ਖਰਚ ਕਰਦੇ ਹੋ ਇਹ ਜਿਹੜੇ ਡੱਬਰ ਕਰਦੇ ਨੇ ਇਹਦਾ ਮਤਲਬ ਕੀ ਹੈ ਠੀਕ ਹੈ ਆ ਜਿਹੜੇ 300 ਸਾਲੇ 500 ਸਾਲੇ ਬਣਾ ਕੇ ਡੱਬਰ ਕਰਦੇ ਨੇ ਮਤਲਬ ਕੀ ਹੈ ਇਹ ਰੀਸ ਕਰਨਾ ਜਰਮਨੀ ਵੀ ਉਹ ਰੀਸ ਕਰਦੇ ਨੇ ਕੱਟ ਕਰਦੇ ਨੇ ਅਸੀਂ ਵੀ ਕਰ ਲਈਏ ਆਪਾਂ ਦਾ ਬੋਧੀ ਰੀਸ ਦੀ ਸੀ ਕਰ ਸਕਦੇ ਸਾਡੀ ਦੀ ਰੀਸ ਉਹਨਾਂ ਨੇ ਕਰ ਲਈ ਹੈ ਸਾਡਾ ਧਰਮ ਬੋਧ ਠੀਕ ਹੈ ਪੁਰਾਣੇ ਦੀ ਰੀਸ ਕਰਨੇ ਪੁਰਾਣੇ ਬਣ ਚੋਗੇ ਜੇ ਜੇ ਜੇ ਜੀ ਆਪਣੀ ਅਸੀਂ ਆਪਣੀ ਯਾਦ ਚੱਲਣ ਉਹ ਚੱਲਣ ਠੀਕ ਹੋ ਜਾਣਗੇ ਨਹੀਂ ਚੱਲਣ ਅਸੀਂ ਤਾਂ ਆਪਣੀ ਚਾਹ ਲਗਵਾ ਲਈ ਸੱਚ ਦੀ ਚਾਹ ਲਗਵਾ ਲਈ ਝੂਠ ਦੇ ਪਿੱਛੇ ਲੱਗ ਠੀਕ ਸੱਚਾ ਨੇ ਸਾਚੀ ਕਾਲ ਬੋਲੀ ਅਡੋਪਣ ਕਰਨਾ ਜਿਵੇਂ ਨਾ ਵਰਗੇ ਜੀ ਹੋਜੀ ਹਾਂ ਜੀ ਹਰ ਪੜਨਾ ਹਰ ਬੁੱਝਣਾ ਹਰ ਸਿਓ ਰੱਖੋ ਪਿਆਰ ਹਰ ਜੱਪੀਏ ਹਰ ਧਿਆਈਏ ਹਰ ਨਾਮ ਆਧਾਰ ਹਰ ਪੜਨਾ ਹਰ ਬੁੱਝਣਾ ਹਰ ਸਿਓ ਰੱਖੋ ਪਿਆਰ ਹਰ ਜਗ੍ਹਾ ਇਹ ਹਨ ਤੇ ਆਈ ਹੈ ਹਰ ਦਾ ਨਾਮ ਹੈ ਹਰ ਦਾ ਰੂਪ ਆਧਾਰ ਕਾ ਨੂਰ ਵੀ ਆਧਾਰ ਹੈ ਸਾਡੇ ਪੱਲੋਂ ਪੜ੍ਹਨ ਨੂੰ ਪੜਨਾ ਗਿਆ ਤੇ ਪੜ੍ਹਾਈ ਹੈ ਹਾਂਜੀ আর ਪੜ੍ਹਨਾ ਇਦੀ ਪੜ ਕੇ বুਝਣਾ ਵੀ ਹੈ ਹੂੰ আর ਪਹਿਲਾਂ ਪੜਨਾ ਫਿਰ ਪੜ ਕੇ ਬੁੱਝੇ ਦੇ ਹਰ ਤੁਰਾ ਕਾਪੀ ਆਰੇ ਹਾਂਜੀ ਸਰ ਆ ਜਪੀਏ ਹਰ ਤੇ ਆਈਏ ਇਹ ਜਪ ਲਈਏ ਫਿਰ ਧਿਆਨ ਵੀ ਹੋ ਜਾ ਰੱਖੀਏ ਹਰ ਕਾ ਨਾਮ ਆਰਦਾਉ ਸਦ ਗੁਰ ਕੇ ਨਾਮ ਨੂੰ ਆਰਮਨ ਲਈਏ